ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗੀ ਜਾਗਾਂ ਬਿਟੇ ਹੋਵਾਂ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਰੇ ਪੁਰਖ ਨੇ ਜene ਪੁਰਖੋ ધਨ ਗੁਰੂ ਜਿਹੜੇ ਗਿਆਨ ਦੇ ਲੋਕਾਂ ਨੂੰ ਪੁਰਖ ਕਹਿੰਦੇ ਅਸਲ ਕਿਉਂ ਪੂਰਾ ਕਰ ਦੇ ਰਿਹਾ ਕਿਸੇ ਦਾ ਗਿਆਨ ਦੂਰ ਪੂਰਾ ਕਰਨ ਵਾਲਾ ਜਿਹੜਾ ਟੀਚਾ ਹੈ ਉਹ ਪੁਰਖ ਹੁ ਤ ਹੈ ਹਰਦੇ ਵਿੱਚ ਸਾਡੇ ਪੁਰਖ ਹੈ ਜਿਹਨੂੰ ਪੁਰਖ ਕਹਿੰਦੇ ਪੂਰੀ ਪੂਰੀ ਬੁਝੰਤਾ ਸਾਪੁਰਖ ਜਿਹੜਾ ਹਿਰਦੇ ਵਿੱਚ ਵਸਦਾ ਪਰਖ ਕਿਉਂ ਮਨ ਨੂੰ ਪੂਰਾ ਕਰਦਣ ਗਿਆ ਗੁਰਬੁਝੇ ਨਹੀਂ ਦੱਸਦਾ ਨਾ ਉਹ ਹੀ ਪੂਰਾ ਕਰਦਾ ਹੈ ਬਿਚਿ ਸਰਲ ਪਰਖ ਮਾ ਪਰਖ ਹਪਤੋ ਸਾਰੇ ਜਿੰਨੇ ਪਰਖ ਨੇ ਉਹਦਾ ਜਿਹੜਾ ਜਾਨਬਾਨੇ ਗਿਆਨ ਤਾਂ ਸਾਰੇ ਹੀ ਪ੍ਰਦਾਨ ਹੋਇਆ ਜਿਹੜਾ ਗਿਆਨ ਸਾਰਿਆਂ ਨੂੰ ਹਾਂ ਸਾਧ ਸੰਗੀ ਜਾਟਾ ਮਿਡੇਵ ਮਾ पांच सात दी अपना संभि मान ली ने सारे अहंकार मिटा लिया प्रधान हो जाए और खान और प्रधान होता है फदाजैद जाकर बैठे हो को जो जाने नीचा सो गणीए सबसे ऊंचा आप को जो जाने नीचा सो गणीए सबसे सो नीचा का पर दास है जो नीचा गांगा वो ऊचा के नहीं जा होता ਦਰਗਾ ਘੜੀਆਂ ਵਾਲਾ ਬਗੜੀ ਨਾਮ ਹੁੰਦਾ ਜੀ ਇਹਦਾ ਅਰਥ ਇਹਦਾ ਅਰਥ ਇਹ ਹੈ ਕਿ ਦਰਗਾਹ ਤੋਂ ਸਾਰਿਆਂ ਨੂੰ ਉੱਚਾ ਬਣਾ ਜਾਂਦਾ ਉਹਨੂੰ ਉੱਚਾ ਦੱਸਦੇ ਨੇ ਘੜੀ ਹੈ ਉਹ ਦਰਗਾਹ ਦੇ ਵਿੱਚ ਸਾਰਿਆਂ ਨੂੰ ਉੱਚਾ ਬਣਾ ਜਾਂਦਾ ਜਿਹੜਾ ਇੱਥੇ ਕਹਿਮਾ ਸਾਰਿਆਂ ਨੂੰ ਦੀਵਾ ਸਾਰਿਆਂ ਨੂੰ ਦੀਵਾ ਸਮੁੰਦਰ ਹੁੰਦਾ ਸਭ ਤੋਂ ਜ਼ਿਆਦਾ ਪਾਣੀ ਹੁੰਦਾ ਇਸ ਸਮੁੰਦਰ ਤੇ ਸਭ ਤੋਂ ਜ਼ਿਆਦਾ ਜਾਦਾ ਗਿਆਨ ਉੱਚੇ ਤੋਂ ਦਾ ਪਾਣੀ ਖੜਦਾ ਹੀ ਨਹੀਂ ਜਿਵੇਂ ਸਮਝਦਾ ਧੀਵੇਂ ਤੋਂ ਜ਼ਿਆਦਾ ਪਾਅ ਕਰ ਸਬੂਤਰ ਧੀਵੇਂ ਤੋਂ ਹੀ ਹੁੰਦਾ ਉਸ ਮੁਦਦ ਰੂਪ ਹੈ ਨਾ ਉਹ ਦਿਨ ਵਾਂ ਇੰਥੇ ਹਾਂਜੀ ਜਿਆਦਾ ਮਨ ਹੋਏ ਸਗਲ ਕੀ ਦੀਨਾ ਉਹਦਾ ਸ਼ਕੀ ਚੜਦਾ ਕਲਾਸ ਪਰਬਤ ਤੇ ਜਿਹੜਾ ਕਲਾਸ ਪਰਬਤ ਤੇ ਉੱਤੇ ਨਹੀਂ ਜਾਂਦਾ ਹੈ ਉਤੇ ਅਕਲ ਦਾ ਕੋਈ ਸਮਾਗਤ ਹੋਦਾ ਨਹੀਂ ਸਮਾਧੀ ਦੇ ਵਿੱਚ ਅਕਲ ਤੋਂ ਡਰਦੇ ਨੇ ਸਮਾਧੀ ਵਾਲੇ ਅਗਲ ਦੇ ਸਰਪ ਕਰਦੀਏ ਇਹ ਬੇਗਲਾਣਾ ਚਾਹੁੰਦੇ ਨੇ ਵੀ ਫਿਰ ਸੋਚਣਾ ਬੰਦ ਕਰ ਦੋ ਸੋ ਤਾਂ ਅਗਲਾ ਬੇਗਲਾ ਉਹ ਤਾਂ ਕੰਪਨੀ ਨਾਲ ਜਿਹੜਾ ਕੁੱਤੇ ਵੀ ਜਾਂਦਾ ਅਕਲ ਦਾ ਤੋਂ ਡਰਦਾ ਹੈ ਸਮਝਾ ਥੱਲੇ ਅਕਲ ਨੂੰ ਉਹ ਦਰ ਜਿਹੜਾ ਜੂੜਰ ਵੱਲੋਂ ਜਾਂਦਾ ਉਹ ਗਲਵਾ ਅਕਲ ਵਾਲ ਨੂੰ ਜਾਂਦਾ ਜਿਹੜਾ ਪਰਬਤ ਤੇ ਨੂੰ ਜਾਂਦਾ ਤੇ ਕਰਦੇ ਨੇ ਅਕਲ ਗਿਆਨਾ ਬੰਨ ਕਰਦੇ ਹਾਂ ਗਿਆਨਾ ਬੰਨ ਕਰਦੇ ਹੋਇਆ ਤਾਂ ਹੈ ਜੀ ਫਿਰ ਉਹ ਪਹਾੜ ਤੇ ਜਾ ਕੇ ਦੱਸਦੇ ਆ ਇਹ ਹੋ ਗਏ ਇਹ ਪਦਾਰਥ ਤੋਂ ਪਰੇ ਜਾਓ ਸੋਚਣਾ ਬੰਦ ਹੋ ਜੀ ਸ਼ਾਇਦ ਉੱਤੇ برفੇ برف ਹੁੰਦੀ ਹੈ ਉਹ ਕੋਹਦਾ ਜੀ ਐ ਕਿ ਮਤ ਹੋ ਜੀ ਕਹਿੰਦੇ ਵੀ ਉਹ ਹੋ ਕੇ ਬੋਲਣ ਨਹੀਂ ਮੋਰੀ ਹੋ ਕੇ ਕਹਿੰਦੇ ਬੋਲਣਾ ਨਹੀਂ ਬੋਲੇ ਤੇ ਸਾਡੀਆਂ ਅੱਛਾ ਜਾਹਰ ਹੋਦੀਆਂ ਨੇ ਤੇ ਬੋਲਾਂ ਦੇ ਨਹੀਂ ਸਾ ਮਾਦੀਆਂ ਪੈਣ ਜੀ ਕਹਿੰਦੇ ਆਸਾਦਿਸ਼ ਨਾ ਬਣੀ ਉਹ ਤਾਂ ਉਤਰ ਉਹ ਤਾਂ ਹੈ ਉਹ ਵੀ ਇਹ ਗੱਲ ਨਾ ਹੈ ਜੇ ਚਲਾ ਵੀ ਗਿਆ ਚੰਦਰ ਚਲਾ ਵੀ ਕਿਤੇ ਗਿਆ ਜਾਂ ਜਿਹੜੇ ਇਕਏ ਨਹੀਂ ਜਿਹਨ ਦੀ ਬਾਣਿਓ ਕਰੇ ਨਹੀਂ ਜਿਹਨ ਦੀ ਬਾਣਿਓ ਕਹੇ ਨਹੀਂ ਕਿਤੇ ਇੱਥੇ ਜਿਹਨਾਂ ਨੇ ਇੱਥੇ ਹੀ ਉਹ ਬੰਦ ਕਰ ਲਈ ਆ ਦੱਸਿਆ ਹੋਇਆ ਬੰਦ ਕੀਤੀ ਪਹਿਲੋ ਵੇਦ ਵਿੱਚ ਦੱਸਿਆ ਹੈ ਇਹਨਾਂ ਨੂੰ ਸਮਾਦੀ ਫਿਰ ਜਾਨਦੇ ਹੀ ਨਾ ਜੇ ਮੇਰੇ ਨਾਲ ਲੱਗੇ ਫਿਰ ਨਾ ਕੀ ਦੇ ਨੇ ਜਗਾਂ 'ਚ ਵੀ ਚੱਲ ਜਿਕੇ ਲੋਕ ਇਹਨਾਂ ਨੂੰ ਉੱਥੇ ਦੇਖਦੇ ਨੇ ਬੜੇ ਬੜੀ ਬਹੁਤ ਸੰਤ ਰਹੇ ਬੜੀ ਜਗ੍ਹਾ ਦੇ ਇਹ ਹੈ ਉਹ ਹੈ ਲੋਕਾਂ ਨੂੰ ਬਣਾ ਕੇ ਮੁਕਤੀ ਵਾਲਾ ਭਾਰਗ ਬਣ ਚੁੱਕਾ ਹੈ ਨਾ ਨਹੀਂ ਸਾਡੀ ਹੈ ਜੰਮੇ ਨਾਏ ਕਦੋਂ ਉੱਜਾਈਏ ਮੱਥੇ ਤੇ ਹੋਰ ਕੀ ਹੋਣਾ ਹੈ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤੇ ਨਹੀਂ ਘਟ ਘਟ ਚੀਨਾ ਜਾਗਾ ਮਨ ਹੋਏ ਸਗਲ ਕੀ ਮਨ ਸਗਲ ਕੀ ਜਿਹਦੇ ਮਨ ਦੀ ਜਿਹੜੀ ਇੱਛਾ ਹੈ ਸਾਰਿਆਂ ਦੀ ਇੱਛਾ ਹੋਵੇ ਉਹਦੇ ਮਨ ਦੀ ਇੱਛਾ ਐਸੀ ਹੋਵੇ ਜਿਹੜੀ ਸਾਡਾ ਤੁੱਜੀ ਲੱਗੇ ਸਗਲ ਕੀ ਰੀਨਾ ਉਹਨੂੰ ਕਹਿੰਦੇ ਨੇ ਉਹਦੀ ਇੱਛਾ ਸਾਰਿਆਂ ਨੂੰ ਜੀ ਲੱਗੇ ਉਹਦੀ ਇੱਛਾ ਚੰਗੀ ਕੱਲ ਕੋ ਜਾ ਕੇ ਪਰਫਕਾ ਦੇ ਸਾਰਾ ਇੱਛਾ ਉਸਾਰਿਆਂ ਚੰਗੀ ਤਰ੍ਹਾਂ ਜੀ ਜਿੱਥੇ ਵੀ ਉਸਾਰ ਦੀ ਇੱਛਾ ਹੋਵੇ ਸਾਰਿਆਂ ਨੂੰ ਜੀ ਲੱਗੇ ਸਾਰੀ ਜਿੱਥੇ ਆ ਜੂਗਾ ਜਿੱਥੇ ਵੀ ਉਸਾਰ ਤਾਂ ਆ ਗਿਆ ਜਾਤਾ ਮਨ ਹੋਏ ਹੋਵੇ ਇਹਦਾ ਮਤਲਬ ਇਹ ਸਮਝ ਲਿਓ ਉਹਨੇ ਘਟ ਘਟ ਅੰਦਰ ਚੀਨ ਲਿਆ ਖੋਜ ਲਿਆ ਹਰਕਾ ਨਾਮ ਤੇ ਨਾ ਹਰ ਹਰ ਨਾਮ ਤੇ ਨਾਮ ਤੇ ਨਹੀਂ ਘਟ ਘਟ ਦੀ ਤੇ ਪਹਿਲਾਂ ਪਰਮਾਤਮਾ ਸਕਦਾ ਕਿ ਉਹਦੀ ਗੱਲ ਸਾਰਿਆਂ ਨੂੰ ਜੱਬੇ ਦੀ ਲੱਗਦੀ ਹੈ। ਕੱਲੋਂ ਮੈਂ ਇਸ ਤਰੀਕੇ ਨਾਲ ਕਰ ਜਾਣੀਆਂ। ਜਿਹੜੀ ਕੌੜੀਓ ਕੌੜੀ ਲੱਗੇ ਕਦੇ ਉਹਦੇ ਤੇ ਮੱਲਮ ਲਾਉਣੀ ਹੋਈ ਨਹੀਂ। ਜਦ ਫਰੀਦ ਕਹਿੰਦਾ ਫਰੀਦਾ ਬੁਰੇ ਦਾ ਭਲਾ ਕਰ। ਉਹ ਮਤਲਬ ਲਾਉਂਦਾ। ਕਿ ਬੁਰੇ ਦਾ ਭਲਾ ਕਰੂ ਕਹਿੰਦਾ ਯਾਰ ਸਾਡਾ ਮਾੜਾ ਹੈ ਜੀ ਤੁਸੀਂ ਬੜੀਏ ਵੀ ਦੱਦਿਆ ਕਰ ਤੋਂ ਫਰੀਦ ਵੀ ਬੜਾ ਖਰਬ ਆ ਉਹ ਹੈ ਬਹੁਤ ਕਹਿਣੋਂ ਬੰਦਰ ਔਰ ਕੰਕਰ ਪੱਥਰ ਜੋੜ ਕੇ ਕਹਿੰਦਾ ਜੀ ਉਹ ਕਹਿੰਦਾ ਕਹਿੰਦੇ ਆ ਬੁਰੇ ਦਾ ਭਲਾ ਤਾਂ ਹੈ ਕਹਿੰਦੇ ਪਰ ਤੁਸੀਂ ਬੁਰੇ ਦਾ ਭਲਾ ਬੁਧਮਤ ਕਹਿੰਦੇ ਨਹੀਂ ਕਰਦੇ ਤੁਹਾਡਾ ਤਾਂ ਵਧੀਆ ਬੰਦਾ ਫਿਰ ਕੋਈ ਐਸਾ ਗਲੇਉ ਵੀ ਦਵੇ ਜਿਹੜਾ ਦੂਗੇ ਬਦਨਾਮੀ ਕਰਦੇ ਨੂੰ ਪਤਾ ਲੱਗ ਲੋਕਾਂ ਨੂੰ ਵੀ ਐਸ ਪੱਕ ਹੁੰਦਾ ਤੁਹਾਡਾ ਖੁਦ ਹੀ ਬਲਦਾ ਐਜਾ ਬੀ ਬਾਣੀ ਚ ਸਭ ਕੁਝ ਲੱਗਿਆ ਹੋਇਆ ਜਿੱਤੇ ਕੜਮੀਆਂ ਗੱਲਾਂ ਕਹੀਆਂ ਨੇ ਉੱਤੇ ਢੇਕ ਵੀ ਬਹੁਤ ਕਹੀਆਂ ਨੇ ਮੱਲਬ ਵੀ ਬਸਰ ਲਾਇਆ ਹੋਇਆ ਝੋੜ ਜੇ ਮਾਰਨੀ ਹੈ ਕਿਤੇ ਝੋੜ ਜੇ ਗੈਣੇ ਨੂੰ ਮਾਰ ਦਿੱਤੀਆ ਉਹ ਹੈ ਨਾ ਢੱਡ ਵਾਸਤੇ ਮਾਰੀ ਹੈ ਕੋਣੂ ਉਹਦੇ ਗਲੀ ਕੱਢਣ ਵਾਸਤੇ ਮਾਰੀ ਹੈ ਕਿਤੇ ਜ਼니아ਰ ਢੱਡ ਵੇਖਿਆ ਸਾਧੂ ਜੋ ਸਾਦੀਵਾਰੀਆਂ ਘੜੀਏ ਘੜੀਏ ਮਾਰੀਏ ਤੋੜਨ ਦਾ ਜਨੀਵਾਰੀ ਕੱਢਵਾਸੇ ਮਾਰੀਏ ਹਰਕਤ ਹਾਂ ਮਨ ਆਪਣੇ ਤੇ ਬੁਰਾ ਮਿਟਾਉਣਾ ਨਾ ਨਾ ਦੁਆਰਾ ਪੜੇ ਤੇ ਰਹਿ ਜਾ ਜੋ ਜਾਂ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤੇ ਨਹੀਂ ਘਟ ਘਟ ਕੇ ਬੰਨ ਦੇ ਕੋ ਕਿਸੇ ਕੋਈ ਦੁਆ ਨਹੀਂ ਬੰਗਾਸ਼ ਕਰ ਮਾਨ ਕਰਕੇ ਮੇਲ ਨਹੀਂ ਆ ਕਿਸੇ ਦਾ ਦੂਵੇਂ ਦਾ ਦੂਵੇਂ ਨੂੰ ਚੰਗਾ ਲੱਗਦਾ ਦੂਏ ਦਾ ਦੂਵੇਂ ਨੂੰ ਚੰਗਾ ਲੱਗਦਾ ਸਾਡੇ ਕੀ ਦੀ ਨਾ ਪਰ ਜਿਹਦਾ ਮਨ ਸਾਰਿਆਂ ਮੈਂ ਫਟਾਜ ਗਏ ਜਿੱਦੀ ਸੋਚ ਸਾਰਿਆਂ ਮੈਂ ਫਟਾਵੇ ਕਿਸੇ ਦੇ ਖਲਾਫ ਹੋ ਨਾ ਸਾਡੇ ਇਹ ਕਹਿਣੇ ਠੀਕ ਸੋਚ ਹੈ ਇਹਦਾ ਮਤਲਬ ਉਹਦੀ ਆਪਣੀ ਸੋਚ ਹੈ ਉਹਦੀ ਹੋ ਆਪਣੀ ਨਹੀਂ ਆ ਸੋਚ ਉਹ ਕਰਨ ਅਪਣਾ ਹੁੰਦੀ ਉਹਦੀ ਕਰਨ ਮਕੀ ਨਾ ਇਹ ਕਿਤਾਬ ਉਹ ਪਰਮੇਸ਼ਰ ਦੀ ਸੋਚ ਆ ਫਿਰ ਉਹ ਤਾਂ ਉਹਨਾਂ ਤੋਂ ਭੋਜਲੀ ਸੁਤੀ ਜਗਾ ਲਈ ਇਸ ਤੀਜੀ ਅੰਦਰ ਸੋਚ ਕੇ ਜਗਾ ਲਈ ਉਹ ਅਸਲੀ ਸੁਤੀ ਪਈ ਸੀ ਜਿਹੜੀ ਦੂਰੀ ਸੀ ਨਾ ਜਿਵੇਂ ਨੌਕਰਾਨੀ ਹੁੰਦਾ ਮਾਲਕਣ ਸੁੱਤੀ ਹੋਵੇ ਨੌਕਰਾਨੀ ਆਪਣਾ ਮਾਲਕੀ ਦਿਖਾਉਂਦੀ ਨਹੀਂ ਉਹ ਉਹੀ ਆਪਣਾ ਦੌਰ ਬਣਉਂਦੀ ਸੀ ਜਦੋਂ ਮਾਲਕਣੀ ਹੈ 봉ਕਾਰ ਸੀ ਉਹ ਤਾਂ ਹੀ ਉਬਦਿੱਜ ਉੱਥੇ ਨਹੀਂ ਘਰ ਆਇਆ ਸੀ ਜਦ ਆਲਕਣੀ ਉੱਠੀ ਉਹ ਤਾਂ ਬਹਿ ਗਿਆ ਉਹ ਤਾਂ ਚੁੱਪ ਕਰਕੇ ਉਹਨੇ ਬੈਠਣਾ ਹੀ ਨਹੀਂ ਦੂਵੀ ਦੇ ਤਾਂ ਦੂਈ ਜਾਗਦੀ ਹੋ ਸੌਂ ਗਈ ਫਿਰ ਸਭ ਦਾ ਖਵਾਦ ਹੋ ਗਿਆ ਮਨ ਉਹ ਜਾਗਦਾ ਹੀ ਸੌਂ ਹੈ ਤੇ ਚੁੱਪੇ ਹੋਇਆ ਜਾਗਦਾ ਸੌਂਣਾ ਉਹ ਚੁੱਪ ਹੋ ਗਿਆ ਬੋਲਦਾ ਹੀ ਨਹੀਂ ਸੱਤਾ ਸੱਤਾ ਨਹੀਂ ਜਾਗਦਾ ਹੀ ਹੋ ਹੈ ਉਹ ਤਾਂ ਝੁੱਤੀ ਹੋਈ ਕਰਕੇ ਚੁੱਪ ਸੀ ਇਹ ਫਿਰ ਜਾਗਦਾ ਹੀ ਸੋਣਾ ਪੈਂਦਾ ਇਹਨੂੰ ਜਿਹੜਾ ਵਜਾਦਾ ਕਰਦਾ ਨਾ ਉਹ ਜਾਗਦਾ ਜਿਹ ਤੋਂ ਉਹਨੂੰ ਪੈਂਦਾ ਬੋਲਤੀ ਉਹ ਬੰਦ ਹੋ ਜਾਂਦੀ ਆ ਹਰ ਹਰ ਨਾਮ ਮਤਨ ਘਟ ਘਟ ਚੰਨ ਰਾਮ ਜੀ ਉਹਨੇ ਸਾਰਿਆਂ ਤੇ ਦੱਸਤਾ ਵੀ ਹਰ ਹੈਗਾ ਆ ਕਹਿ ਕੇ ਹਟੇ ਨੂੰ ਦਾਨ ਦੇ ਅਬਰਤ ਨਾਮ ਤੇ ਨਹੀਂ ਮੈਂ ਇਸ ਦਾ ਬਿਸਰਾਮ ਧਰਨ ਦੇ ਦਰਿਆ ਆਪਣੇ ਆਪਣੇ ਅੰਦਰ ਹੀ ਪੀਓ ਨਾ ਉਹ ਆਦਾ ਸੁਣਨ ਵਾਲਾ ਨਾਮ ਹੈ ਪੀਣ ਵਾਲਾ ਨਹੀਂ ਹੈ ਇਹ ਪੀਣ ਵਾਲਾ ਨਹੀਂ ਹੈ ਸੁਣਨ ਵਾਲਾ ਉਹ ਪੀਣ ਵਾਲਾ ਦਰਮੇਲੂ ਦਾ ਛੋਟਾ ਵਾਲਾ ਬਾਦੂ ਮਿਲ ਸੁਣਨ ਵਾਲਾ ਦੱਸਦਾ ਵੀ ਪੀਣ ਵਾਲਾ ਅੰਦਰ ਹੈ ਤੇਰੇ ਅਸਤਮੈ ਪ੍ਰਾਪਤੀ ਹੈ ਕਹੇ ਜਾ ਤੇਰਾ ਸੁਭਾਅ ਬਦਲਣਾ ਚਾਹੀਦਾ ਹੈ ਦੀ ਬਾਹਰ ਮਾਇਆ ਨਾਲ ਵਰਤ ਉਹ ਸਾਡੀ ਮਤਲਬ ਉਹ ਤੇ ਕਾਬਲ ਬਣਾ ਦਿੰਦਾ ਅੰਦਰੋਂ ਖੋਜਣ ਦੇ ਕਾਬਲ ਹੋਣਾ ਚਾਹੀਦਾ ਬਹਲਾ ਗਿਆ ਉਹ ਤੇ ਕਾਬਲੇ ਬਣਦਾ ਹੋਰ ਕੁਝ ਕਰਦਾ ਨਹੀਂ ਤਾਂ ਦਵਾਈ ਉਹ ਲੈ ਕੇ ਦਿੰਦੀ ਦਵਾਈ ਦੇ ਵੀ ਸਰਦਾ ਸਭ ਕੁਝ ਕਰਦਾ ਹੁਣ ਅੱਗੇ ਪਰਮੇਸ਼ਰ ਦੀ ਮਰਜ਼ੀ ਉਹਦੇ ਵਿੱਚ ਡਰ ਹੋਂਣਾ ਹੈ ਉਹਦੇ ਚ ਆਦਮੀ ਦੀ ਇਸਦੀ ਮਰਜ਼ੀ ਕੋਈ ਨਹੀਂ ਵਾਲਾ ਵੀ ਉਤੋਲ ਉਤਤ ਜਰੇ ਲੈਨਰਡ ਤੋਂ ਵੀ ਯਾਦ ਕਰਦਿਆਂ ਕਹਿੰਦਾ ਜਾ ਕਾਰਨ ਹਮ ਤੂੰ ਮੇਰੇ ਸੋ ਸੁਖ ਅਜ ਹੁ ਸਹੀ ਹੈ। ਕਹਿੰਦਾ। ਸਾਨੇ ਜੀ ਤੋ ਖਤਾ ਦੂਰ ਹੋਇਆ ਜੀ ਨਾਮ ਤਾਂ ਮਿਲਿਆ ਹੀ ਨਹੀਂ। ਕਹਿੰਦਾ ਇਸ ਬਹੁਤ ਨਾਲ ਕਾਰਨ ਜਾਸਤਰ ਕੋ ਤੋ ਖਪਾਗ। ਭਾਵੇਂ ਜੇ ਸਾਕਰ ਮਿਲਿਆ ਸਾਰਾ ਕੁਝ ਉਦੋ ਹੀ ਆ। ਉਦੋ ਬਣੀ ਦੇ ਰਿਹਾ ਜੋ। ਕੱਚਾ ਪੱਕਾ ਜਾਂ ਦੇਖ ਰਹਾ ਉਹ ਕੱਚਾ ਪੱਕਾ ਦੇਖ ਰਹਾ ਉਹ ਦੋ ਕਿਆ ਕੋਈ ਥੋੜੀ ਬਹੁਤੀ ਇੱਜ ਕੱਚੀ ਹੋਊਗੀ ਪਤਾ ਨੂੰ ਲੱਗਦੀ ਹੋ ਕੱਚੇ ਨੂੰ ਕੱਚੇ ਲੱਗਦਾ ਹੋਊਗਾ ਦੇਣ ਵਾਲੇ ਨੂੰ ਤਾਂ ਜਿਆਦਾ ਪਤਾ ਹੋਣਾ ਉਥੋਂ ਵੀ ਦੇ ਰਿਆ ਤਾਂ ਉਹ ਜਾਣੇ ਦੇਣ ਵਾਲਾ ਜਾਣੇ ਕਿ ਕੱਚੀ ਸੀ ਪਰ ਬਲੈਨ ਵਾਲਾ ਤਾਂ ਮੰਗਦਾ ਲੋ ਲੈਣੋੜੇ ਤਾਂ ਆਪਣੀ ਹਾਲਤ ਸਿਪਾਈ ਨਹੀਂ ਦੱਸਦੀ ਹਾਲਤ ਨਹੀਂ ਸਿਪਾਈ ਤੁਹ ਜਦੋਂ ਵੀ ਦਾ ਸਭ ਇਹ ਜਿਹਾ ਕੰਮ ਹੋ ਜਾਂਦਾ ਕੋਈ ਕਬਰਾਂ ਦੀ ਲੋੜ ਨਹੀਂ ਵੀ ਜੇ ਹੁਣ ਲੱਟਦਾ ਤਾਂ ਸੰਸਰ ਦੇ ਬਣੇ ਅੱਜ ਛੇ ਦੇ ਸੇ ਟੈਂਪ ਬਣਦਾ ਉਹ ਸਾਨੂੰ ਭਲੇ ਖੋਰ ਤੁਹਾਡੇ ਸਾਹਬ ਨਾਲ ਨਹੀਂ ਬਣਦਾ ਉਹਨਾਂ ਦੇ ਸਾਹਬ ਕੋਲ ਬਣਦਾ ਉਹਨਾਂ ਦੇ ਸਾਹਬ ਨੂੰ ਬਣਦਾ ਹਾਂਜੀ ਜਾਗਾ ਮਨ ਹੋਏ ਸਗਲ ਰੀਨਾ ਹਰ ਹਰ ਨਾਮ ਤੇ ਨਹੀਂ ਘਟ ਘਟ ਉਸ ਨੇ ਘਟ ਦੇ ਵਿੱਚ ਹੰਝੂ ਦੇਖਿਆ ਅਜੂ ਕੋਲ ਸੀ ਨਾ ਕਿਹਾ ਘਟ ਘਟ ਲਾ ਉਸੇ ਨੇ ਕਿਹਾ ਘਟ ਘਟ ਲਾ ਅਜੂ ਸਾਰ ਨਹੀਂ ਬਾਹਰ ਤਾਂ ਬੁੱਧੀ ਬੜੀ ਬੈਠੇ ਨੇ ਸਮੂਹ ਚ ਵਾਹੇ ਬੈਠੇ ਸਾਰੇ ਥਿਊਰੀ ਬਦਲਤੀ ਅੰਤਰਦੇਵ ਨਗਰ ਦੇ ਅੰਤਰ ਮੈਂ ਜਾਣਿਆ ਅੰਤਰ ਅੰਤਰ ਉਹਦਾ ਹੈ ਜੀਨ ਨੂੰ ਗੂਰ ਗਨ ਕਵੀਰ ਨੇ ਦੇ ਦਿੱਸੇ ਉਹ ਕਿਹਾ ਸੀ ਕਵੀਰ ਨੇ ਇਹ ਦੇ ਦਿੱਸੇ ਕਿਹਾ ਸੀ ਅੰਤਰਦੇਵ ਨੂੰ ਜਾਣ ਹੋ ਸਰਗਨ ਦੇ ਅੱਗੇ ਨਾ ਆ ਗਿਆ ਜਨ ਮੁਖ ਲਾਣਾ ਹੈ ਫਤਿਹ ਸਹੀ ਨਾਨਕਾ ਜੋ ਵਰਗੋਂ ਕੋ ਤੇ ਜਾਇ ਜੋ ਅੱਦਰ ਜਿਹੜਾ ਦੇਵ ਹੈ ਉਹ ਨੂੰ ਨਹੀਂ ਆਣ ਦੇਖਿਆ ਪਿਸਾਨਿਆ ਉਹਨੇ ਕਿਹਾ ਸੀ ਉਹ ਤਾਂ ਇਹਨਾਂ ਹੱਥੋਂ ਤੋਂ ਬਿਨਾਂ ਆੜਿਆਂ ਨੇ ਵੀ ਕਈ ਪਾ ਲਿਆ ਕਈ ਨਾ ਸੁਰਦਾਸ ਸਾਹ ਸੀ ਸੁਰਦਾਸ ਦਾ ਸ਼ਬਦ ਆ ਇਹ ਕਿੰਨਾ ਕਹਾਂ ਤੇ ਉਹਨਾਂ ਸੂਰ ਦਾਦਾਵਨ ਅੰਦੀਆ ਅੰਨਾ ਸੂਰ ਦਾਦਾ ਫਰਕ ਹੈ ਅੰਨਾ ਸੂਰ ਦਾਦਾ ਫਰਕਾ ਅੰਨਾ ਗਦੋਂ ਉਠਾ ਸੂਰ ਦਾਦਾ ਗਦੋਂ ਉਠਾ ਦਿਆ ਸੂਰਾ ਉਹ ਦਾਸ ਵੀ ਹੈ ਇਹ ਸੂਰਾ ਬਰਦਾਸ ਹੈ ਸੂਰ ਦਾਸ ਸੂਰਾ ਸੂਰਾ ਤੋਂ ਪਹਿਚਾਨੀ ਹੈ ਸੂਰਾ ਪਰਮਕਾਦੀ ਨਹੀਂ ਅਦਾਸ ਹੈ ਹਾਂ ਜਿੱਤ ਲਿਆ ਜਗ ਵੀ ਜਿੱਤ ਲਿਆ ਪਰ ਹੈਗਾ ਦਾਸ ਸੂਰਾ ਸਾਰੇ ਹੀ ਹੋ ਜਾਂਦੇ ਨੇ ਇਹ ਕੌਲ ਵਾਲੇ ਸਾਰੇ ਹੀ RAMDAS ਹੋਇਆ SOURDAS ਹੋਇਆ BARDAS ਹੋਇਆ ਇਹ ਸਾਰੇ ਜਿਹੜਾ ਦਾਸ ਅਮਰ ਹੈ ਅਮਰ ਦਾਸ ਜਿਹਦੇ ਆਪਾਂ ਲਖੀ ਬੰਦਨ ਗੁਣਵਾਜ ਕਰਾਉਣੇ ਨੇ ਗੁੰਬਾਜ ਤੋਂ ਨਹੀਂ ਬਾਜੀ ਜਾ ਕੇ ਗੁੰਬਾਜ ਕਿਨ ਬਾਜ ਜਗ ਕਾਮਨ ਨਾ ਹੋਵੇ ਬਾਜੀ ਇਹ ਅਮਰਦਾਤਾ ਲੋਵਰ ਦੇਵ ਹੂੰ ਦਾਸ ਨਹੀਂ ਹੈਗਾ ਪਹਿਲਾਂ ਉਹਨਾਂ ਨਾਲ ਦੇਵ ਕਹਿੰਦੇ ਬੰਦਰੋਂ ਪੈਦੀ ਦਾਸ ਹੁੰਦਾ ਨਾ ਇਹੋ ਕਰਦੀ ਅਮਰ ਜੀ ਦਾ ਉਹ ਦੇਵ ਪੈ ਤੁਰਿਆ ਫਿਰਦਾ ਅੰਦਰ ਨਾ ਦੇ ਤਾਂ ਇਹ ਹੀ ਮੰਗਦਾ ਹੈ ਉਹ ਤਾਂ ਮੰਗਦਾ ਸਤਿਗੁਰੂ ਜੀ ਦੀ ਵਾਰੀ ਹੈ ਜੇ ਦੇਹ ਕੋ ਸਮਰਦੇ ਦਾ ਸਾਡੇ ਤਾਂ ਨੇ ਕਹੀਆਂ ਨੇ ਅਮਰਦੇਵ ਲਿਖ ਦਿੱਤਾ ਪਹਿਲਾਂ ਉਹਨਾਂ ਨੇ ਪਤਾ ਵੀ ਹੁਣ ਅਮਰਦੇਵ ਦਾ ਅਗੇ ਲਗਾਇਆ ਉਹ ਅਮਰਦੇਵ ਨੇ ਲੱਗ ਸਕਦੇ ਸੀ ਇਹ ਆ ਵੀ ਉਹ ਦੱਸਦੇ ਅਮਰਦੇਵ ਜਿਹੜਾ ਸੀ ਉਹ ਚ ਕੀ ਨੁਕਸ ਸੀ ਕਿਉਂ ਬਦਲਿਆ ਗਿਆ ਜੇ ਠੇ ਰਾਮਦਾਸ ਕਿਉਂ ਕੀਤਾ ਗਿਆ ਲੈਣੇ ਤਾਂ ਅੰਗਦ ਕਿਉਂ ਕੀਤਾ ਗਿਆ ਸਾਡਾ ਮਤਲਬ ਬਗਲੇ ਹੀ ਨੇ ਕਿ ਕਾਰਨ ਸੀ ਪਿੱਛੇ ਰਹਿਣ ਹਾਂਜੀ ਮਨ ਆਪਣੇ ਤੇ ਬੁਰਾ ਮਟਾਣਾ ਸੋਹਣਾ ਬਟਾਣਾ ਮਨ ਆਪਨੇ ਦੇ ਬੁਰਾ ਮਟਾਣਾ ਮਨ ਆਪਣੇ ਤੇ ਬੁਰਾ ਮਟਾਣਾ ਸੇਚੇ ਸਾਜਨਾ ਆਪਣੇ ਅੰਦਰੋਂ ਬੁਰਾਈ ਨੂੰ ਬਿਦਾਰੋ ਬੁਰੀ ਭਾਵਨਾ ਕਿਸੇ ਤੇ ਪ੍ਰਤੀ ਬੁਰੀ ਭਾਵਨਾ ਦੁੱਖਤ ਕਉ ਕਰੂ ਮਨ ਤੋਂ ਮਟਾਵੇ ਕਹਦੇ ਜੇ ਜੀਵ ਜੀਵ ਤੋਂ ਮਟਾਈਏ ਮਨ ਜੋਵੇ ਉਹ ਤਾਂ ਦਿਖਾ ਹੋਈ ਹੁੰਦੀ ਆ ਹੋਰ ਗੱਲ ਮਨ ਆਪਨੇ ਦੇ ਬੁਰਾ ਮਟਾਉ ਤੇ ਕੇ ਸਗਲ ਸ੍ਰਿਸ਼ਟ ਸਮਝ ਲੈ ਤਾਂ ਗਤੇ ਸਾਰੇ ਸ੍ਰਿਸ਼ਟੀ ਦੇ ਪੱਜਾਂ ਦੀ ਦ੍ਰਿਸ਼ਟੀ ਨਾਲ ਦੇਖੂਗਾ ਉਹ ਦ੍ਰਿਸ਼ਟੀ ਤਾਂ ਬੰਦੀ ਡਰਾਉਣੀ ਹੈ ਅੰਦਰੋਂ ਦੇਖੀ ਤਾਂ ਬਰੂਜੇ ਮੁੱਜੋ ਮਡੂ ਵੀ ਪੂਰੀ ਭਾਵਨਾ ਜੇ ਮੰਜੂਰੀ ਭਾਵਨਾ ਦੇਸੀ ਹੋਣੀ ਹੋਈ ਨਹੀਂ ਬਰਮੀ ਹੈ ਤਾਂ ਦੇਖੂਗਾ ਸਭ ਤੋਂ ਸਪੂਝਾ ਜਨਾ ਕਰਕੇ ਜੇ ਮੁੱਜੋ ਬੁਰਾਈ ਮਟਾ ਦੂਗਾ ਕੋੜਾ ਨਹੀਂ ਹੁੰਦਾ। ਦੁਖ ਸੁਖ ਜਦ ਸਮ ਦ੍ਰਿਸ਼ਟੀਤਾ ਨਾਨਕ ਪਾਪ ਪੁੰਨ ਨਹੀਂ ਲੇਪਾ। ਜਿਹੜਾ ਜਾਣ ਦੁਖ-ਕੌੜ ਸੁਖ ਨੂੰ ਸਮਾਨ ਕਰਕੇ ਜਾਣਦਾ ਇਹ ਵੀ ਦਾਤੇ ਨਹੀਂ ਦਾਤਾ। ਜਿਸਨੂੰ ਦੁਖ-ਭੂ ਸੁਖ ਸਰਵਾਰ ਇਹ ਵੀ ਦਾਤੇ ਸਮ ਕਰਕੇ ਜਾਣਦਾ ਸਮ ਦ੍ਰਿਸ਼ਟੀਤਾ। ਨਾਨਕ ਪਾਪੋ ਨਹੀਂ ਲੇਪਾ। ਜੇ ਸਮ ਕਰਕੇ ਮੰਨਣ ਲੱਗ ਜਵੇ ਇਹ ਸਮਝ ਹੁਣ ਤੈਨੂੰ ਪਾਪੋ ਨਹੀਂ ਲੇਪ ਦੀਏਗਾ। ਇਹ ਦੂਲ ਪਾਪੋ ਵੀ ਨਾ ਲੱਗਦਾ। पर পাপ ਉਹ ਪਹਿਲਾਂ ਲੱਗੀ ਜਾਂਦਾ ਜੇ ਆਹ ਦੁੱਖ ਸੁੱਖ ਬਰਾਬਰ ਦੋ ਵਟ ਦੇ 1000 ਪਾਪ ਉਹ ਵੱਢੀ ਜਾਂਦਾ ਹੈ ਚਾਹੇ ਹੁਦਾਬਲੀ ਜਾਂ ਅੰਦੀ ਕਮੀਨ ਜਾਂਦੇ ਕਮੀਨ ਵਾਲੇ ਪਾਪ ਉਹ ਵੱਢਦਾ ਜਾਂਦੀ ਕਮੀਨ ਵਾਲੇ ਦੁੱਖ ਸੁੱਖ ਹੁੰਦੇ ਕਮੀਨ ਵਾਲੇ ਆ ਿਤ ਭੇਦ ਬੁਸਤ ਆਪਣਾ ਤੀ ਸਮਝਦਾ ਪ੍ਰਾਇਆਸ ਨੂੰ ਕਰਨ ਆ